ਪੋਥੀ ਸਾਹਿਬ चार ਚਾਰ ਸ੍ਰਿਲੇਖਾਂ ਹੀਟ ਅੱਖਰਾਂ उपदेश दर्ज है ਹੈ ਇਹ ਚਾਰ ਬਾਣੀਆਂ ਦੇ ਨੋ ਹਨ ਰਾਗ ਗੌੜੀ ਪੂਰਵੀ ਬਾਵਨ ਅਖਰੀ ਕਬੀਰ ਜੀਓ ਕੀ ਰਾਗ ਆਸਾ ਮਹੱਲਾ ਪਹਿਲਾ ਪੱਟੀ ਲਿਖੀ ਰਾਗ ਆਸਾ ਮਹੱਲਾ ਤੀਜਾ ਪੱਟੀ ਅਤੇ ਸਾਡਾ ਇਹ ਉਪਰਾਲਾ ਹੈ ਕਿ ਇਹਨਾਂ ਅੱਖਰਾਂ ਦਾ ਜੋ ਉਪਦੇਸ਼ ਹੈ ਸੰਗਤਾਂ ਨਾਲ ਸਾਂਝਾ ਕਰੀਏ ਇਹ ਉਪਦੇਸ਼ ਅਸੀਂ ਊੜੇ ਤੋਂ ਲੈ ਕੇ ਰਾੜੇ ਅੱਖਰ ਤੱਕ ਜਿਸ ਤਰ੍ਹਾਂ ਕੀ ਪੰਜਾਬੀ ਦੀ ਕਾਇਦੇ ਵਿੱਚ ਲਿਖਿਆ ਹੈ ਇਸ ਉਸ ਹੀ ਤਰਤੀਬ ਵਿੱਚ ਸਾਂਝਾ ਕਰਾਂਗੇ ਤੇ ਬਾਬਾ ਜੀ ਮੈਂ ਆਪ ਨੂੰ ਇਹ ਬੇਨਤੀ ਕਰਦਾ ਕਿ ਆਪ ਜੀ ਇਸ ਗੱਲ ਤੇ ਚਾਨਣਾ ਪਾਓ ਕਿ ਅੱਖਰਾਂ ਨਾਲ ਜੋ ਸੰਦੇਸ਼ ਦੇਣ ਦਾ ਉਪਰਾਲਾ ਕੀਤਾ ਸੀ ਇਹਦਾ ਕੀ ਕੀ ਕਾਰਨ ਹੈ ਫਿਰ 베ਦ ਵਿੱਚ ਕਹਿੰਦਾ ਨੇ ਪਹਿਲਾਂ 베ਦ ਦੀ ਜਿਹੜੀ ਸ਼ਲੋਕ ਨੇ ਉਹ ਜ਼ਬਾਨੀ ਅੰਤ ਕਰਦੇ ਸੀ ਲੋਕ ਕਾਗਜ਼ ਨਹੀਂ ਸੀ ਹੁੰਦਾ ਲਿਖੇ ਨਹੀਂ ਸੀ ਜਾਂਦੇ ਜਵਾਨੇ ਕੋਈ ਵੀ ਚੀਜ਼ ਹੋਵੇ ਉਹ ਗਿਆਨ ਘਟਦਾ ਰਹਿੰਦਾ ਫਿਰ ਇਹ ਅੱਖਰ ਬਣਾਏ ਪਹਿਲਾਂ ਅੱਖਰ ਕਹਿੰਦੇ ਸੀ ਇਹਨੂੰ ਫਿਰ ਅੱਖਰ ਕਹਿਣ ਲੱਗੇ ਹੁਣ ਅੱਜ ਕੱਲ੍ਹ ਅਸੀਂ ਅੱਖਰ ਕਹਿੰਦੇ ਹਾਂ ਖਖੇ ਦੇ ਸਾਂ ਖਖਾ ਆ ਗਿਆ ਕਿ ਸ਼ਾਇਦ ਇਹ ਸਾਂ ਸੀ ਫਿਰ ਭਾਸ਼ਾ ਬਦਲਦੀ ਹੈ ਭਾਸ਼ਾ ਬਦਲ ਨਾਲ ਸਭ ਤੇ ਬਦਲਿਆ ਗੂੜ੍ਹ ਭਾਵਨਾ ਉਹੀ ਹੈ ਉਸੇ ਚੀਜ਼ ਨੂੰ ਅੱਖਰ ਕਹਿੰਦੇ ਸੀ ਉਸੇ ਨੂੰ ਅੱਖਰ ਕਹਿੰਦੇ ਸੀ ਉਸੇ ਨੂੰ ਅੱਖਰ ਕਹਿੰਦੇ ਅੱਜ ਇੱਕ ਅਖਰ ਲੱਭਦੀ ਅਸੀਂ ਇਹਦੇ ਵਿੱਚ ਵਰਤਦੇ ਆ ਆਤਮਾ ਜੋਤ ਵਾਸਤੇ ਵਰਤਦੇ ਆ ਅਖਰ ਖਰ ਜਿਹੜਾ ਜਿਹਦੇ ਵਿੱਚ ਜਰਾ ਰੋਗ ਤੋਂ ਜੋ ਮੁਕਤ ਹੈ ਉਹਨੂੰ ਅਖਰ ਕਹਿੰਦੇ ਆ। ਉਹ ਕਹਿੰਦੇ ਆ ਅਸੀਂ ਜੋਤ ਵਾਸਤੇ। ਏਥੇ ਨੂੰ ਜਿਹੜਾ ਗਿਆਨ ਹੈ ਇਹਨੂੰ ਜੇ ਅੱਖਰਾਂ ਦੇ ਵਿੱਚ ਲਿਖ ਦਈਏ। ਪੜ੍ਹਦਾ ਨਹੀਂ। ਪੜ੍ਹਦਾ ਨਹੀਂ ਖਰਦਾ ਨਹੀਂ। ਕੰਮ ਨਹੀਂ ਹੁੰਦਾ। ਇਹਨੂੰ ਰੋਕਣ ਵਾਸਤੇ ਅੱਖਰੀ ਅੱਖਰਾਂ ਵਿੱਚ ਲਿਖ ਦਿੱਤਾ। ਸਾਹਾ ਤੌਰ ਤੇ ਜਿੱਥੇ ਬੋਲਦੇ ਆ ਉਹ ਦੀ ਜਿਦਾ ਅੱਖਰ ਨੇ ਲੈ ਲਈ ਇਥੇ ਕੋਈ ਜਿਦਣ ਕੇ ਤਾਂ ਕਿ ਫਿਰ ਉਹ ਪੜ ਕੇ ਇਹ ਘਟੇ ਨਾ ਗਿਆਨ ਸਮਝਿਆ ਜਾ ਸਕੇ ਜਵਾਨੀ ਆ ਜਿਹੜਾ ਜਵਾਨੀ ਕੀਤਾ ਹੋਇਆ ਉਹਦਾ ਘਟ ਜਾਂਦਾ ਭੁੱਲਿਆ ਜਾ ਸਕਦਾ ਕੋ ਭੁੱਲ ਜਾਂਦਾ ਇਹ ਕਰਕੇ ਇਹਨਾਂ ਨੂੰ ਵੀ ਅੱਖਰ ਕਹਿੰਦੇ ਨੇ ਉਹਨੂੰ ਅੱਖਰ ਗਾਏ ਉਹਨਾਂ ਨੇ ਥੋੜਾ ਜਿਹਾ ਫਰਕ ਵੀ ਰੱਖਿਆ ਹੋਇਆ ਗੱਲ ਇੱਕੋ ਹੀ ਭਾਵਨਾ ਇੱਕੋ ਹੀ ਹੈ ਵਿੱਚ ਅੱਖਰਾਂ ਦੇ ਵਿੱਚ ਅੱਖਰ ਜਦ ਖੜੇ ਗਏ ਨੇ ਅੱਖੜੇ ਜਾਇ ਨੇ ਅੱਖਰ ਅੱਖਰਾਂ ਦੇ ਵਿੱਚ ਹੀ ਬ੍ਰਮ ਗਿਆਨ ਹੈ ਅੱਖਰਾਂ ਦੇ ਵਿੱਚ ਦੂਸਰਾ ਵਰਧਾਰੀ ਗਿਆਨ ਅੱਖਰ ਦੇ ਵਿੱਚ ਕੀ ਤੇ ਇਹਦਾ ਅੱਖਰ ਖੋਲਿਆ ਅੱਖਰਾਂ ਦਾ ਹਾਂਜੀ ਠੀਕ ਹੈ ਜੀ ਆਪਾਂ ਇਹ ਜੋ ਅੱਖਰਾਂ ਦਾ ਗਿਆਨ ਹੈ ਇਹਨੂੰ ਜੋ ਅੱਜਕੱਲ ਪੰਜਾਬੀ ਦਾ ਕਾਇਦਾ ਹੈ ਪੂਰੇ ਤੋਂ ਲੈ ਕੇ ਡਾੜੇ ਤੱਕ ਉਸੇ ਤਰਤੀਬ ਵਿੱਚ ਆਪਾਂ ਇਹਨਾਂ ਅੱਖਰਾਂ ਦਾ ਗਿਆਨ ਲਵਾਂਗੇ ਸਭ ਤੋਂ ਪਹਿਲਾ ਜੋ ਗਿਆਨ ਹੈ ਉਹ ਊੜੇ ਅੱਖਰ ਦੁਆਰਾ ਹੈ ਭਗਤ ਕਬੀਰ ਜੀ ਦੁਆਰਾ ਰਾਗ ਗੋੜੀ ਪੂਰਵੀ 52 ਅਖਰੀ ਕਬੀਰ ਜੀ ਉਹ ਕੀ ਦਰਜ ਹੈ 6ਵੀਂ ਪੌੜੀ ਵਿੱਚ ਊੜੇ ਅੱਖਰ ਤੋਂ ਇਹ ਉਪਦੇਸ਼ ਹੈ ਜੀ ਓੰਕਾਰ ਆਦਮੈ ਜਾਨਾ ਲਿਖਿ ਅਰ ਮਿਟੈ ਤਾਹੇ ਮਾਨਾ ਓੰਕਾਰ ਲਖੈ ਜੋ ਕੋਈ ਸੋਈ ਲਖੀ ਮੇਟਣਾ ਨਾ ਹੋਈ ਵੈਸੇ ਤਾਂ ਇੱਕ ਇਹ ਤਾਂ ਅੱਗੇ ਵੀ ਪਹਿਲਾਂ ਵੀ ਇੱਕ ਉਹਨਾਂ ਨੇ ਇਹ ਪੌੜੀ ਬਾਵਨ ਅੱਖਰ ਲੋਕ ਤਰਾ ਸਭ ਕਿਥੇ ਦੀ ਵਾਹ ਹੈ ਇਹਨੇ ਅੱਖਰ ਨੇ ਮੇਰੇ ਕੋਲ ਸਿਰ ਲੋਕ ਦਾ ਗਿਆਨ ਹੈ ਮੈਂ ਇਹਨਾਂ ਦੇ ਵਿੱਚ ਦੇਣਾ ਇਹ ਅੱਖਰ ਖਰਜਾਂਗੇ ਉਹ ਅਖਰਨ ਵਿੱਚ ਨਹੀਂ ਇਹ ਅੱਖਰ ਜਿਹੜੇ ਨੇ ਤਤਾਂਾਂ ਦੇ ਵਿੱਚ ਲਿਖਿਆ ਹੋਇਆ ਗ੍ਰੰਥਾਂ 'ਚ ਲਿਖਿਆ ਹੋਇਆ ਇਹ ਖਾ ਜਾਂਦੇ ਨੇ ਪੁਰਾਣੇ ਹੋ ਜਾਂਦੇ ਨੇ ਕਾਗਜ਼ ਪੁਰਾਣਾ ਹੋ ਜਾਂਦਾ ਉਹ ਹਰ ਜਿਹੜਾ ਗਿਆਨ ਆ ਜਿਹਦਾ ਗਿਆਨ ਹੈ ਫਤਵਾ ਨਹੀਂ ਜੋਤ ਨਹੀਂ ਇਹਨਾਂ ਦੇ ਵਿੱਚ ਹੈ ਜੋਤ ਅੱਖਰਾਂ 'ਚ ਨਹੀਂ ਰਹਣੀ ਜੋਤ ਬਾਹਰੋਂ ਜੋਤ ਤਾਂ ਗਿਆਨ ਦਿੱਤਾ ਜਾਂਦਾ ਹੈ ਆਪਾਂ ਕਿਉਂਕਿ ਅੱਖਰੋਂ ਤੋਂ ਸ਼ੁਰੂ ਹੁੰਦਾ ਜਿੱਦ ਤੋਂ ਵੀ ਕਿਹਾ ਓਮਕਾਰ ਤੋਂ ਆਦਮਾ ਜਾਣਾਂ ਜਿੱਥੋਂ ਆਪਾਂ ਸ਼ੁਰੂ ਕਰਦੇ ਆਂ ਓਰੇ ਤੋਂ ਓਮਕਾਰ ਬਣਦਾ ਲਓ ਇੱਥੇ ਦਾ ਹਾਲਾ ਕਿ ਓਕਾਰ ਲਿਖਿਆ ਹੋਇਆ ਪੂਰਾ ਅਸੀਂ ਤਾਂ ਇੱਥਾ ਲਾ ਕੇ ਓਕਾਰ ਊੜੇ ਥੱਲੇ ਨਾਲ ਓਕਾਰ ਬਣਾਇਆ ਜਿਵੇਂ ਮੂਰੇ ਉੱਤੇ ਐ ਇੱਥੇ ਓਕਾਰ ਸਤਿਨਾਮ ਕਰਤਾ ਪੁਰਖ ਗੁਰਪ੍ਰਸਾਦ ਉੱਤੇ ਕੱਲਾ ਹੀ ਊੜਾ ਹੀ ਲਿਖਿਆ ਹੈ ਊੜੇ ਦੇ ਨਾਲ ਓੜਾ ਜਿਹਾ ਕੇ ਓਕਾਰ ਬਣਾਈ ਹੋਈ ਹੈ ਉੱਤੇ ਉਹ ਕਹਿੰਦੇ ਨੇ ਓਕਾਰ ਪੂਰਾ ਲਿਖਿਆ ਹੈ ਊੜੇ ਨੂੰ ਅਸਲ ਤੇ ਊੜਾ ਹੋਰ ਇੰਤੀਆਂ ਵਿੱਚ ਨਹੀਂ ਆਉਂਦਾ ਹੈ ਹੋਰ ਵਰਣ ਵਾਲਾ ਜੀ ਹੋ ਗੁਰੂ ਕੀ ਬਾਣੀ ਸਾਡੇ ਹੋਂਕਾਰ ਆਤਮਾ ਜਾਨਾ ਜਿਹਨੂੰ ਓਮਕਾਰ ਕਹਿੰਦੇ ਨੇ ਜਿਹਨੂੰ ਕਹਿੰਦੇ ਸੀ ਪਹਿਲਾਂ ਉਹਨੂੰ ਓਮਕਾਰ ਕਹਿੰਦੇ ਭਗਤ ਸਿੰਘ ਜੀ ਉਹ ਜਿਹੜਾ ਸ਼ਬਦ ਹੈ ਉਹ ਵੀ ਆਇਆ ਹੋਇਆ ਗੁਰਤਨ ਚੋਂ ਜੋਤ ਹੁੰਦੀ ਹੈ ਓਮਕਾਰ ਜਾਨ ਹੁੰਦਾ ਜਾਂ ਸ੍ਰਿਸ਼ਟੀ ਰਜਦਾ ਸਹਿਜ ਅਵਸਥਾ ਚ ਓਮਕਾਰ ਹੈ ਉਹਨੂੰ ਸਮਾਦਿ ਵਿਚ ਹੋਂ ਜੋਤ ਜਿਹੜੀ ਹੈ ਪੂਰਨ ਜੋਤ ਉਹਨੂੰ ਸਮਾਦ ਅਵਸਥਾ ਵਿੱਚ ਰਚਨਾ ਨਹੀਂ ਹੁੰਦੀ ਯਾ ਰਚਨਾ ਕਰਦੀ ਹੈ ਇੱਛਾ ਪੈਦਾ ਅੰਪੀਰ ਰਚਨਾ ਦੀ ਸਿਰ ਓਂਕਾਰ ਹੈ ਇਸੇ ਤੋਂ ਓਂਕਾਰ ਹੈ ਕਿ ਸਭ ਤਕਬੀਰ ਦੀ ਹੈ ਜੇ ਨਾ ਉਹਦਾ ਉਹਦਾ ਰੂਪ ਹੈ ਜੋ ਰਚਨਾ ਹੈ ਉਹ ਕਹਣਾ ਓਂਕਾਰ ਜੋ ਸ੍ਰਿਸ਼ਟੀ ਦਾ ਆਧਾਰ ਹੈ ਸਾਰੀ ਦਾ ਇਹਨੇ ਸਿਰ ਪੈਦਾ ਕੀਤੀ ਹੈ ਚਾਹੇ ਉਜੜ ਆਇਆ ਚਾਹੇ ਕੇਹਤਾ ਨਾ ਉਹ ਮੈਂ ਜਾਣ ਲਿਆ ਓਂਕਾਰ ਆਧ ਮੈਂ ਜਾਣਾਂ ਪਰ ਓਂਕਾਰ ਆਦ ਕੀ ਹੈ ਜਿਹੜਾ ਲਿਖ ਕੇ ਉਹ ਲਿਖੇ ਅੱਖਰ ਦੇ ਤੌਰ ਤੇ ਲਿਖੇ ਜਾਂਦੇ ਕਿ ਆਉਂਗੇ ਉਹਦਾ ਦਰਸ਼ਨ ਕਰੋ ਉਹਦੇ ਤੇ ਧਿਆਨ धरो ਉਹਦਾ ਜਾਪ ਕਰੋ ਇਹ ਜਿਹੜਾ ਹਤਲਵਾ ਕੀਤਾ ਹੋਇਆ ਸੀ ਪਰਪੰਚ ਉਹਨੂੰ ਘਟਣ ਵਾਸਤੇ ਕਹਿੰਦਾ ਜਿਹੜਾ ਲਿਖ ਤੁਸੀਂ ਮਟਿਆ ਲਿਖ ਕੇ ਮਟਿਆ ਜਾ ਸਕਦਾ ਉਹ ਓਮਕਾਰ ਨਹੀਂ ਹੁੰਦਾ ਲਿਖਾ ਰ ਮਿਟੇ ਜਿਹੜਾ ਲਿਖ ਕੇ ਦਿੱਤਾ ਜਾ ਸਕਦਾ ਓਮਕਾਰ ਉਹ ਮੈਂ ਨਹੀਂ ਉਹ ਨਹੀਂ ਓਮਕਾਰ ਹੁੰਦਾ ਉਹਦਾ ਅਖਰੀ ਰੂਪ ਐ ਅਸਲੀ ਓੰਕਾਰ ਦਾ ਓੰਕਾਰ ਉਹਦੇ ਵਿੱਚ ਨਹੀਂ ਹੁੰਦਾ ਅਖਰ ਦੇ ਵਿੱਚ ਓੰਕਾਰ ਵੱਖਰਾ ਹੈ ਉਹਦੇ ਨੂੰ ਉਹ ਅਖਰ ਦਾ ਰੂਪ ਚਾਹੋਦਾ ਹੈ ਵੀ ਉਖਾਰ ਉਹਦਾ ਉਚਾਰਨ ਹੈ ਸਿਰਫ ਅਖਰਾਂ ਕਿ ਲਿਖ ਔਰ ਮਚੈ ਪਾਹੀ ਨਹੀਂ ਮਾਨਾ ਜਿਹੜਾ ਲਿਖ ਕੇ ਪਟਾ ਦਿੱਤਾ ਜਾਂਦਾ ਹੈ ਅਖਰ ਓੰਕਾਰ ਨਹੀਂ ਹੁੰਦਾ ਲਿਖਾਇਆ ਓੰਕਾਰ ਨਹੀਂ ਹੈ ਓੰਕਾਰ ਜਿਹਦੇ ਪਰਖਾਇਆ ਹੈ ਉਹ ਅਲੱਗ ਹੈ ਓੰਕਾਰ ਅਸੀਂ ਕਹਿੰਨੇ ਆ ਕਹਿੰਨੇ ਓੰਕਾਰ ਉਹ ਖਰਜੀ ਮੇਰੇ ਦੱਸਾ बोलदे ਹੁੰਦੇ ਵਾਸਤੇ ਓਕਾਰ। ਤਾਰ ਬੋਲੋ ਕੋਈ ਹੋਰ ਵੀ ਬੋਲ ਸਕਦਾ। ਬੋਲਣ ਜੇਗਾ ਨਾ ਕੁਝ ਵੀ ਰੱਖਿਆ ਜਾ ਸਕਦਾ। ਪਰ ਜਦੋਂ ਆਪਰੇ ਰੂਪ ਦੇਤਾ ਤਾਂ ਓਕਾਰ ਥੋੜੀ ਬਣ ਇਹਨੂੰ ਕੋਈ ਓਕਾਰ ਨਾ ਸੁਭਝਿਲੇ ਹੋ ਅੱਖਰ ਨੂੰ ਲਿਖ ਲੂ। ਇੱਕ ਉਹ ਵਰਜਦਾ ਸਾਨੂੰ। ਉਹ ਗੱਲ ਵੈਸੇ ਅਸੀਂ ਚੜ ਬੈਠਿਆਂ। ਸਭ ਕਹਿੰਦੇ ਸਿੱਧ ਨਹੀਂ ਉਰਕਾਰ ਬੈਠਿਆਂ। ਪਰ ਬਾਣੀ ਦਾ ਜਿਹੜੇ ਅੱਖਰ ਨੇ ਇਹਨਾਂ ਨੂੰ ਕੁਝ ਹੋਰ ਮੰਨ ਬੈਠਿਆਂ ਸੀ। ਅੱਖਰ ਤਾਂ ਬੰਦੇ ਹੀ ਨਹੀਂ ਅਸੀਂ। ਇਹ ਰੂਪ ਨੂੰ ਸ਼ਬਦ ਰੂਪ ਮੰਨ ਲਿਆ ਸ਼ਬਦ ਸ਼ਬਦ ਹੁੰਦਾ ਬੋਲੇ ਤੇ ਅੱਖਰ ਹੀ ਲਿਖਣਾ ਅੱਖਰ ਹੁੰਦੇ ਨੇ ਬੋਲਣ ਬਾਣ ਬੋਲੇ ਤੇ ਬਾਣੀ ਬਾਡੀ ਬਾਣੀ ਕਰਨਾਂ ਦਾ ਵਿਸ਼ਾ ਸ਼ਬਦ ਕਰਨਾਂ ਦਾ ਵਿਸ਼ਾ ਅੱਖਰਾਂ ਦਾ ਵਿਸ਼ਾ ਹੀ ਨਹੀਂ ਹੈ ਸ਼ਬਦ ਜੋ ਦੀ ਦਾ ਅੱਖਰ ਨੂੰ ਸ਼ਬਦ ਦਾ ਅਖਰੀ ਰੂਪ ਜਿਹੜਾ ਹੈ ਆਵਾਜ਼ ਦਾ ਅਖਰੀ ਰੂਪ ਹੈ ਉਹ ਸ਼ਬਦ ਦਾ ਅਖਰੀ ਰੂਪ ਹੈ ਇਹ ਲਿਖਤ ਰੂਪ ਹੈ ਜਦੋਂ ਨੂੰ ਬੋਲਾਂਗੇ ਸ਼ਬਦ ਰੂਪ ਜੀ ਇਹ ਸਮਝਰ ਦੀ ਲੋੜ ਪਈ ਇੱਥੇ ਅਸੀਂ ਅਵਿਸ਼ਾਇਲੀ ਕੀਤੀ ਹੋਈ ਹੈ ਰੌਲਾ ਪਾਈ ਜਾਂਦੇ ਸ਼ਬਦ ਗੁਰੂ ਸ਼ਬਦ ਗੁਰੂ ਸ਼ਬਦ ਦੇ ਵਿੱਚ ਧਿਆਨ ਹੁੰਦਾ ਗੁਰੂ ਇਹ ਵੀ ਠੀਕ ਹੈ ਉਹ ਸਮਝ ਉਹ ਵਿਚਾਰ ਤੇ ਬਾਅਦ ਪਤਾ ਲੱਗਦਾ ਸ਼ਬਦਾਂ ਵਿੱਚੋਂ ਗੁਰਬਾਣੀ ਵਿੱਚੋਂ ਆਵਾਜ਼ ਵਿੱਚੋਂ ਵਿਚਨ ਕਰੇ ਤੇ ਉਸ ਵਿਚਾਰੇ ਤੇ ਸ਼ਬਦ ਗੁਰੂ ਦਾ ਦਰਸ਼ਨ ਹੋਣਾ ਸ਼ਬਦ ਵਿੱਚ ਜੋ ਗੁਰੂ ਹੈ ਗੁਰੂ ਦੀ ਪ੍ਰਾਪਤੀ ਹੋਣੀ ਹੈ ਜਿਵੇਂ ਦੁੱਧ ਕਿਹੋ ਹੈ ਕਿਉਂਕਿ ਚ ਕੱਢੇ ਤਾਂ ਅਲੰਗ ਬਾਹਰ ਵਿਚਨ ਕਰੇ ਤੇ ਜਿਕਰੂਗਾ ਬਾਹਰ ਇਹ ਮੈਂ ਬੋਲਰ ਦੇ ਤੱਕ ਜਿਹੜਾ ਗਿਆਨ ਹੈ ਉਹ ਵਿਚਾਰਨ ਤੋਂ ਬਾਅਦ ਪਤਾ ਲੱਗੂ ਹਾਂਜੀ ਓੰਕਾਰ ਲਖੇ ਕੋਈ ਸੋਈ ਲਖ ਮੇਟਣਾ ਨਾ ਹੋਈ ਲਖ ਲਵੇ ਦੇਖ ਲਵੇ ਉਹ ਲਖਿਆ ਹੋਇਆ ਨਹੀਂ ਫਿਰ ਮਟਾਇਆ ਜਾ ਸਕਦਾ ਉਹਦੇ ਵਿਚਾਲੇ ਨਹੀਂ ਕੋ ਬੰਦਾ ਆ ਸਕਦਾ ਇਹ ਤਾਂ ਜਿਹੜਾ ਓੰਕਾਰ ਲਖਿਆ ਇਹਦੇ ਵਿਚਾਲੇ ਤਾਂ ਪੜਦਾ ਦੇ ਤੋ ਪਰੇ ਚਲੇ ਜਾਓ ਓੰਕਾਰ ਅੱਗੇ ਆਇਆ ਹੋਰ ਹੀ ਪੜਦਾ ਉਹਨਾਂ ਨੂੰ ਉਹਨੇ ਬਿਚਾਇਆ ਜਾ ਸਕਦਾ ਹੋਜੀ ਅਛਾ ਲਖੈ ਦਾ ਭਾਵ ਦੇਖਣਾ ਹੋਇਆ ਹੈ ਜੀ ਬੁੱਧੀ ਦਾ ਗਿਆਨ ਲੈਣਾ ਸਮਝ ਲੈਣਾ ਦੇਖ ਲੈਣਾ ਠੀਕ ਹੈ ਸਮਝਦੇ ਹਾਂ ਨਾ ਨਾ ਨਾ ਲਖਣਾ ਲਖੜਾ ਨਿਕਲਾਂ ਦੀ ਹੁਦਫਾ ਠੀਕ ਹੈ ਜੀ ਸੋਈ ਲਖੀ ਮਿਟਣਾ ਨਾ ਹੋਈ ਉਹ ਲਗਿਆ ਉਹ ਦਰਸ਼ਨ ਤਾਂ ਮਿਟੇ ਨਹੀਂ ਸਕਦਾ ਹੁਣ ਇੱਥੇ ਬਣਾ ਜੀ ਉਹ ਵਾਰ ਦਰਸ਼ਨ ਹੋਏ ਕਿਉਂ ਭਾਈ ਫਿਰ ਕਿੱਥੇ ਚਲਾ ਗਿਆ ਸਰ ਬਿਆਖੀ ਸੀ ਤੇ ਕਿਹੜੇ ਪਰਦੇ ਚ ਲੋਕ ਗਿਆ ਉਹ ਦਰਸ਼ਕ ਦੇਖ ਕੇ ਉਹ ਐ ਜਾਂ ਉਹ ਜਿਲਕੁਰ ਜੋਕ ਸਾਖੀਆਂ ਬਣਾਈਆਂ ਹੋਈਆਂ ਨੇ ਫੇਰ ਬਣਾਵੀਆਂ ਬਾਅਦ ਦੇ ਸਾਖੀਆਂ ਸਾਡੂ ਸਿੱਖਾਂ ਨੂੰ ਪੜਾਉਂਦੀਆਂ ਨੇ ਬਣਾ ਬਣਾ ਕੇ ਠੀਕ ਹੈ ਜੀ ਇੱਥੇ ਇਹ ਜਿਹੜਾ ਵਿਦੇਸ਼ ਸੀਗਾ ਇਹ ਹੈਗਾ ਜੀ ਭਗਤ ਕਬੀਰ ਜੀ ਦੀ ਬਾਗਨ ਅਖਰੀ ਦਾ ਹੁਣ ਆਪਾਂ ਸ਼ੁਰੂ ਕਰਦੇ ਆਂ ਰਾਗ ਅਸਾ ਮਹੱਲਾ ਪਹਿਲਾ ਪੱਟੀ ਲਿਖੀ ਇਦੇ ਵਿੱਚ ਉਪਦੇਸ਼ ਹੈ ਜੀ ਊੜੇ ਉਪਮਾ ਤਾਕੀ ਕੀ ਕੀਜੇ ਯਾਕਾ ਅੰਤ ਨਾ ਸੇਵਾ ਕਰੇ ਸੋਈ ਫਲ ਪਾਵੇ ਜਿੰਨੀ ਸੱਚ ਕਮਾਇਆ ਇਹ ਤੀਸਰੀ ਫੌਣੀ ਤੇ ਉਪਦੇਸ਼ ਹੈ ਜੀ ਰਾਗ ਮਹੱਲਾ ਪਹਿਲਾ ਪੱਟੀ ਜਰਕੇ ਪਹਿਲੀ ਫੌਣੀ ਦਾ ਉਪਦੇਸ਼ ਜੋ ਹੈ ਉਹ ਬਾਣੀ ਵਿੱਚ ਸੱਸੇ ਤੋਂ ਹੈ ਹਾਂ ਤਾਂ ਕੀ ਕਿਜੇ ਸਭ ਤੋਂ ਪਹਿਲਾਂ ਊੜਾ ਹੁੰਦਾ ਹੈ ਸਭ ਤੋਂ ਪਹਿਲਾਂ ਉਪਦੇਸ਼ ਵੀ ਇਹੀ ਹੈ ਇਹ ਤੋਂ ਪਹਿਲਾਂ ਵੈਸੇ ਸੱਸੇ ਨਾਲ ਦਿੱਤਾ ਹੋਇਆ ਉਹਨਾਂ ਨੇ ਤੀਸਰੇ ਨੰਬਰ ਤੇ ਹੈ ਕੋਈ ਗੱਲ ਨਹੀਂ ਆਪਾਂ ਸੱਸਾ ਜੱਲ ਲਵਾਵਾਂਗੇ ਜਿਆਦਾ ਆਊਗਾ ਸੱਸਾ ਆ ਅਸਲੀ ਸ਼ੁਰੂ ਹੁੰਦੀ ਹੈਗੀ ਇਹ ਮੈਂ ਇੱਕ ਵਾਰ ਤੁਹਾਡਾ ੴ ਸਤਿਗੁਰ ਪ੍ਰਸਾਦ ਸੱਸੇ ਸੋਈ ਸ੍ਰਿਸ਼ਟ ਦਿਨ ਸਾਜੀ ਸਭਨਾ ਸਾਹਿਬ ਇੱਕ ਪਿਆ ਸੱਸੇ ਤੋਂ ਹੈ ਫਿਰ ਮਨ ਕਾਹੇ ਭੂਲੇ ਊੜ ਮਨਾ ਅਸਾ ਇਹ ਰਹਾ ਉਹ ਫਿਰ ਈਵੜੀ ਹੈ ਈਵੜੀ ਤੋਂ ਬਾਅਦ ਫਿਰ ਊੜੇ ਤੋਂ ਸ਼ੁਰੂ ਹੁੰਦੇ ਕੋਈ ਈਵੜੀ ਆਦਪੁਰਖਾ ਕਰਤਾ ਆਪੇ ਸੱਚਾ ਸੋਈ ਹਾਂ ਇਸ ਉਹ ਦੂਜੀ ਪੌੜੀ ਹੈ ਤੀਸਰੀ ਪੌੜੀ ਹੈ ਹੁਣ ਆਪਣੇ ਊੜੇ ਦੀ ਨੰਬਰ ਵਾਰ ਕੋਈ ਜੋ ਜੋ ਨਹੀਂ ਨੇ ਆਪਣੀ ਆਪਣੇ ਤੌਰ ਤੇ ਇੱਕ ਸਾਖੀ ਦੇਣੀ ਹੈ ਨੰਬਰ ਵਾਰ ਉਹ ਨੰਬਰ ਵਾਰ ਦੇ ਹਿਸਾਬ ਨਾਲ ਅਖਰ ਅੱਗੇ ਪਿੱਛੇ ਰੱਖ ਲੈਂਦੇ ਨੇ ਗੱਲ ਤਾਂ ਅਖਰਾਂ ਦੇ ਉੱਤੇ ਬਾਣੀ 흘ਦਾ ਹੱਸਦਾ ਨੰਬਰ ਵਾਰ ਕੋਈ ਯੂਜ ਨਹੀਂ ਉਪਮਾ ਆ ਉਪਮਾ ਕਰਨੀ ਹੈ ਪਹਿਲਾਂ ਤਾਂ ਉਪਮਾ ਨਾਲ ਕਰਨ ਤੋਂ ਹਟਾਇਆ ਜਿਹਦਾ ਅੰਤ ਪਾਇਆ ਜਾ ਸਕਦਾ ਹੈ ਉਪਮਾ ਨਹੀਂ ਕਰਨੀ ਕਰਦੇ ਜਿਹਦਾ ਅੰਤ ਹੈ ਜੋ ਜੰਮਣ ਵਾਲਾ ਹੈ ਉਦੀ ਭਗਵੰਤ ਕਰਦੀ। ਉਦੀ ਕਰਦੀ ਆ ਜਿਹੜਾ ਹੰਸੇ ਨਹੀਂ ਪਾਇਆ ਇਸ ਤਰ੍ਹਾਂ। ਬਗਵੰਤ ਆਪ ਕੂੜਾ ਉਪਮਾ ਤਾਸੀ ਕੀ ਜਿਹਾ ਕੰਮ ਤਨ ਪਾਇਆ। ਜੋ ਉਪਜਿਆ ਸੋ ਬਿੱਲ ਚਾਹੀਦੀ ਹੈ। ਸੇਵਾ ਕਰੇ ਸੋਈ ਫਲ ਪਾਵੇਂ ਜਿੰਨੀ ਸੱਚ ਕਮਾਇਆ। ਨਾ ਨਾ ਸਾਜੀ ਕਬਈ ਕੀਤੀ ਹੈ। ਇਹਦਾ ਸਹਿਬਦੈ ਨੇ ਸ਼ਬਦ ਵਿਚਾਰ ਦੇਨੇ। ਸੱਚੀ ਬਾਣੀ ਨੂੰ ਵਿਚਾਰਦੇ ਨੇ ਸੱਚ ਲੱਭਦੇ ਨੇ ਅਤੇ ਸੱਚ ਤੇ ਚੱਲਦੇ ਨੇ ਉਹਨਾਂ ਨੂੰ ਸੱਚ ਅੰਮ੍ਰਿਤ ਪਲ ਲੱਗਦੇ ਸੱਚ ਦਾ ਗਿਆਨ ਉਹਨਾਂ ਨੂੰ ਦਰਦਾ ਹੋਜੀ ਫਿਰ ਆਪਾਂ ਨੂੰ ਉਪਦੇਸ਼ ਹੈ ਜੀ ਗੋੜੀ 52 ਅਖਰੀ ਮਹੱਲਾ ਪੰਜਵਾਂ ਪੌੜੀ ਹੋੰਗ ਸਾਧ ਸਤਿਗੁਰ ਇਹਤੇ ਓਂ ਸ਼ਬਦ ਵਰਤੇ ਓਂ ਕਾਲੀ ਵਰਤਿਆ ਇਸੇ ਕਰਕੇ ਨਾਮ ਸਾਧ ਆਇਆ ਓ ਸਾਧ ਸਤਗੁਰ ਤੁਸੀਂ ਸਤਗੁਰ ਕਹਿੰਦੇ ਆ ਜਿਹਨੂੰ ਸਾਧ ਕਹਿੰਦੇ ਆ ਪਰ ਆਤਮਾ ਨੂੰ ਇਹ ਗੂੜੂ ਓ ਓਹ ਬੋਲਦਾ ਨਹੀਂ ਚੁੱਪ ਹੈ ਉਹ ਬੋਲਣ ਜਾਣਦਾ ਜੀ ਮੈਂ ਆਪੋ ਬੋਲਣਾ ਜਾਣਦਾ ਉਹ ਬੁਲਾਇਆ ਤਾਂ ਬੋਲਣਾ ਆਪ ਨਹੀਂ ਬੋਲਦਾ ਜਦ ਆਪਨੇ ਬੋਲਦਾ ਜਿਹੜਾ ਬੋਲਦਾ ਵੀ ਉਹ ਹੂ ਜਿਹੜਾ ਆ ਬੋਲਦਾ ਓਂਕਾਰ ਓਂ ਸਾਧ ਸਤਗੁਰੂ ਰੂਪਕਾਰੰ ਜਿਹੜਾ ਓਂਕਾਰ ਦਾ ਸਤਗੁਰੂ ਰੂਪਕਾਰ ਹੈ ਤੁਮੇ ਚਾਰ ਕਰ ਨਿਉ ਦੇ ਦੇ ਚੁਕ ਜਾਣਾ ਆਦਿ ਬਦ ਅੰਤ ਆਤ ਤੋਂ ਲੈ ਕੇ ਜਿਹੜਾ ਜਾ ਰਿਹਾ ਵਿਚਾਰਾ ਵਿਚਾਰਾ ਹਿੱਸਾ ਜਿੱਦੋ ਰਚਨਾ ਹੈ ਰਚਨਾ ਤੋਂ ਪਹਿਲਾਂ ਤੋਂ ਲੈ ਕੇ ਰਚਨਾ ਦੇ ਦੌਰਾਨ ਤੇ ਰਚਨਾ ਦੇ ਅੰਤ ਤੱਕ ਆਰਤਬੱਧ ਅੰਤ ਬਾਅਦ ਦਾ ਰਚਨਾ ਦੇ ਦੌਰਾਨ ਹੁਣ ਤੱਕ ਰਚਨਾ ਸੰਪੂਰਨ ਹੋ ਜਾਊਗਾ ਜਿਨ ਕਾਰੇ ਉਹ ਕਦੇ ਜਫਤਾ ਨਹੀਂ ਹੈ ਜਦ ਜਨਮ ਦਿਨ ਹੈ ਤਾਂ ਜਨਮਕਾਰ ਇਹਦਾ ਓੰਕਾਰ ਦਾ ਕੀ ਫਰਕ ਹੈ ਓੰਕਾਰ ਦਾ ਹੁਕਮ ਨਾਲ ਨਾਲ ਅਕਾਲ ਨਾਲ ਇਹਦੇ ਅਕਾਲ ਨਾਲ ਹੀ ਦੀ ਅੱਦਾ ਇਹ ਜਿਹੜਾ ਮੂੜ ਹੈ ਇਹ ਨਹੀਂ ਹੁੰਦਾ ਜਨਮ ਦੇ ਵਿੱਚ ਸਾਧ ਨਹੀਂ ਜੁੜਦਾ ਅੱਦਲਾ ਸਤਗੁਰ ਜੁੜਦਾ ਸਤਗੁਰ ਤੇ ਖਾਲੀ ਕੋਈ ਨਹੀਂ ਇਹ ਨਹੀਂ ਜੁੜਦਾ ਮਾਇਆ ਨੂੰ ਅੱਛਾ ਜੀ ਸਤਗੁਰ ਤੇ ਸਾਧ ਹੋਣ ਦਾ ਰੂਪ ਹੈ ਜਿਹੜਾ ਕਿ ਮਾਇਆ ਤੋਂ ਪਰੇ ਹੈ ਹਾਂ ਇਹ ਦੋਤਾ ਹੈ ਪਰ ਹੁਕਮ ਨਹੀਂ ਰੂਪਦੀ ਹੈ ਇਸ ਤਰ੍ਹਾਂ ਅੱਧਾ ਅਧੂਰਾ ਇਹ ਅਜੇ ਅੱਛਾ ਜੀ ਆਪੇ ਆਪਹਿ ਸੁਖ ਆਸਨ ਆਪਹਿ ਸੁਨਤ ਆਪ ਹੀ ਜਾਸਨ ਆਪੇ ਸੁਨ ਆਪੇ ਆਪ ਸੁਖ ਆਸਨ ਸੁਖ ਆਸਨ ਵੀ ਆਪੇ ਸੁਖ ਆਸਨ ਆਪ ਕਰਦੇ ਆ ਸੁਨਣ ਕਰਦੇ ਆ ਅਸਲ ਚ ਸੁਖ ਆਸਨ ਨਹੀਂ ਹੁੰਦਾ ਆਪੇ ਸੁਨ ਆਪਣੇ ਸੁਨਣਾ ਸੁਨਣ ਸਮਾਦ ਲਗਾਉਂਦਾ ਜਾਂ ਸੁਨਣ ਸਮਾਦ ਲਗਾਉਂਦਾ ਜਦ ਵੀ ਆਪੇ ਹੁੰਦਾ ਜਦ ਸੁਖ ਆਸਨ ਹੁੰਦਾ ਸੁਖ ਆਸਨ ਇਸ ਵਕਤ ਰਚਨਾ ਹੁੰਦੀ ਐ ਸੁਖਾਸਣ ਹੁੰਦਾ ਰਚਨਾ ਜੋਦਾ ਸੁਖਾਸਣ ਰਚਨਾ ਬਲ ਦੇਖਦਾ ਸੁਖਾਸਣ ਆਪੇ ਸੁਣੋ ਆਪ ਸੁਖਾਸਣ ਆਪੇ ਸੁਣਦਾ ਆਪ ਹੀ ਜਾਸਣ ਆਪੇ ਸੁਣਦਾ ਆਪੇ ਸਮਝਦਾ ਸੁਣਦਾ ਵੀ ਆਪ ਸਮਝਦਾ ਤੂੰ ਜਾਣਦਾ ਵੀ ਆਪਾ ਜਾਣਦਾ ਸਮਝਣ ਆਪ ਆਪੇ ਬਾਪ ਆਪ ਹੀ ਮਾਇਓ ਆਪਾਂ ਆਪ ਆਪੋ ਪਾਇਓ ਆਪਣਾ ਆਪ ਆਪੇ ਪੈਦਾ ਕਰਦਾ ਇਹ ਆਪਣਾ ਮਨ ਆਪ ਪੈਦਾ ਕਰਦਾ ਜੇ ਕਰਦਾ ਆਪਣਾ ਪਾਣਾ ਆਪ ਪੈਦਾ ਕਰਦਾ ਆਪਣਾ ਪਾਣੀ ਪੈਦਾ ਕਰਦਾ ਆਪਨ ਆਪ ਆਪੋ ਪਾਇਓ ਆਪੇ ਹੀ ਉਪਾਇਓ ਆਪਣਾ ਆਪੇ ਹੀ ਪੈਦਾ ਕਰਦਾ ਆਪਣੇ ਅੰਦਰ ਅੰਦਰ ਇੱਛਾ ਆਪੇ ਪੈਦਾ ਕਰਦਾ ਇੱਛਾ ਚਾਹੇ ਮਾਇਦੀ ਹੋਵੇ ਚਾਹੇ ਨਾਮ ਦੀ ਹੋਵੇ ਆਪੇ ਬਾਪ ਆਪ ਹੀ ਪਾਇਓ ਇਸ ਕਰਕੇ ਆਪਣਾ ਬਾਪ ਆਪ ਦਾ ਆਪਣੀ ਹੀ ਹੈ ਇਹਦਾ ਕੋਈ ਦੂਜਾ ਬਾਪ ਆਪ ਹੁੰਦਾ ਉਪਰ ਗੁਰਦੇਵ ਬਾਦਾ ਗੁਰਦੇਵ ਪਤਾ ਆਇਆ ਨਾ ਠੀਕ ਹੈ ਸੂਖਮ ਆਪੈ ਅਸਥੂਲਾ ਨਾ ਜਾਈ ਨਾਨਕ ਲੀਲਾ ਆਪੈ ਸੂਖਮ ਸੂਖਮ ਕੀਏ ਜਿਹੜਾ ਅੰਦਰ ਥਾਲੇੰਦਾ ਸੂਖਮ ਰੂਪ ਹੈ ਦਾ ਜਿਹੜਾ ਸਤਗੁਰ ਰਹਿਣਾ ਉਹ ਸੂਖਮ ਹੈ ਤੇ ਸੂਲਾ ਵੀ ਮਨ ਹੈ ਇਸ਼ਾ ਰੂਪ ਜਸ ਤੁਲਰਾ ਹੈ ਜਿੜੀ ਇੱਛਾ ਹੈ ਦੇ ਅੰਦਰ ਸਰੀਰ ਨਾਲ ਜੁੜ ਕੇ ਉਹ ਹਸੂਲਾ ਆਪੇ ਸੁਖਮ ਆਪੇ ਸੁਲਾ ਲਖੀ ਨਾ ਜਾਏ ਅਨੰਦ ਕਲੀਲਾ ਇਸ ਸਰਕਾਰ ਲੀਲਾ ਜਿਹੜੀ ਇਹਦੀ ਲਖੀ ਵੀ ਜਾ ਸਕਦੀ ਇਹ ਸਰੀਰ ਨਾਲ ਜੁੜ ਕੇ ਹਸੂਲਾ ਹੈ ਮਾਇਆ ਤੋਂ ਪਰੇ ਰਹਿੰਦਾ ਦਾ ਸੁਖਮ ਹੈ ਠੀਕ ਹੈ ਜੀ ਇਹ ਪਹਿਲੀ ਪੌੜੀ ਸੀਗੀ ਜੀ ਜਿਹੜੀ ਊੜੇ ਬਾਰੇ ਪੰਜਵੇਂ ਪਾਤਸ਼ਾਹ ਨੇ ਲਿਖੀ ਐ ਗੋੜੀ ਬਾਵਾ ਅਖਰੀ ਦੂਸਰੀ ਪੌੜੀ 'ਚ ਵੀ ਇਸੇ ਗੱਲ ਦਾ ਖਲਾਸਾ ਜੀ ਊੜੇ ਤੋਂ ਹੀ ਪੌੜੀ ਉਹ ਅੰਗੁਰਮੁਖੀ ਕੀਓ ਅਕਾਰਾ ਇੱਕਹਿ ਸੂਤ ਕਰੋ ਜੋਤ ਐ ਅਦੇ ਨਾ ਗੁਰਮੁਖੀ ਆ ਗਿਆ ਜੋਤ ਹੈ ਸਰ ਜੋਤ ਜਦ ਕੱਲੀ ਐ ਤਾਂ ਉਹ ਐ ਕਿਉਂ ਆਕਾਰਾ ਆਕਾਰਾ ਜਦ ਕੀਤਾ ਜਾਦੇ ਦਾ ਆਕਾਰਾ ਕੀਤਾ ਆਪਣਾ ਆਪ ਫੈਦਾ ਕੀਤਾ ਥੋਂ ਇਹਨੇ ਆਕਾਰਾ ਕਰ ਲਿਆ ਪਹਿਲਾ ਮਾਨ ਰੂਪ ਇਹ ਪੈਦਾ ਹੋਇਆ ਇੱਛਾ ਹੋਈ ਆਕਾਰਾ ਪੈਦਾ ਕਰਦੀ ਇੱਛਾ ਇੱਛਾ ਹੀ ਆ ਸਰੀਰ ਹੈ ਇੱਛਾ ਹੀ ਇਹ ਸਰੀਰ ਰੂਪ ਪੈਦਾ ਹੋਈ ਹੈ ਇੱਕ ਸੂਤ ਪਰੋਵਲ ਨਾ ਜਿੱਕਈ ਸੂਤ ਤੇ ਵਿੱਚ ਸੂਤ ਕੀ ਹੈ ਪ੍ਰੋਵਲ ਹਾਰਾ ਸੂਤ ਕੋਈ ਹੈ ਇੱਛਾ ਦੀ ਇੱਕ ਆਪਣੀ ਇੱਛਾ ਦੇ ਨਾਲ ਬੁਰਗਾ ਰੱਖਿਆ ਹੈ ਇਹਨੂੰ ਸਰੀਰ ਨੂੰ ਆਪਣੀ ਇੱਛਾ ਨਾਲ ਹੀ ਬਸ ਰੱਖ ਰੋ ਕੇ ਰੱਖਿਆ ਹੈ ਸਾਰੇ ਦੇ ਸਰੀਰ ਦੇ ਦੋ ਪੈਰ ਇਹਦੇ ਭਾਂਵੇਂ ਚੱਲਦੇ ਨੇ ਜਿਹਦੀ ਇੱਛਾ ਚੱਲਦੇ ਨੇ ਇਹਦੇ ਚਲਾਏ ਚੱਲਦੇ ਨੇ ਏ ਉਹ ਉਹ ਗੰਭੀਰ ਗੱਲ ਹੋ ਰਹੀ ਹੈ ਜੀ ਸੂਤ ਸੁਤੋਖ ਸੂਤ ਰਹਿਣੇ ਨੇ ਨਾ ਗਿਆਨ ਸਤੂਖ ਤੂੰ ਤੇ ਗਿਆਨ ਨੂੰ ਫੈਦੇ ਇੱਕ ਗਿਆਨ ਉਸ ਸੁਤੋਖ ਹੈ ਉਹ ਹੀ ਦਾਣ ਸੂਤ ਬਣਦਾ ਮਨ ਨੂੰ ਕਾਬੂ ਕਰਨ ਵਾਸਤੇ ਗਿਆਨ ਦੀ ਲੋੜ ਹੈ ਗਿਆਨ ਹੀ ਸੂਤ ਬਣ ਜਾਂਦਾ ਸਰੀਰ ਨੂੰ ਕਾਬੂ ਰੱਖਣ ਦਾ ਸਾਨੂੰ ਗਿਆਨ ਹੈ ਤਾਂ ਕਾਬੂ ਰੱਖਦੇ ਹਾਂ ਤੁਰੰਤ ਦਾ ਗਿਆਨ ਬੋਲਣ ਦਾ ਗਿਆਨ ਹੈ ਤਾਂ ਬੋਲ ਸਕਦੇ ਆ ਸੰਤ ਨੇ ਜੀਭ ਚੇਈਏ ਵਿਖਾ ਕੇ ਜੀਭ ਰਹੀ ਨਹੀਂ ਰਹੀ ਹੈ ਸੰਤ ਕੱਟ ਨਹੀਂ ਸਕਦੇ ਬੋਲਦੇ ਵੀ ਹੈਗੇ ਸਰੀਰ ਤੇ ਕੰਟਰੋਲ ਰੱਖਣ ਦੀ ਸਾਡੇ ਕੋਲ ਗਿਆਨ ਹੈ ਸਰੀਰ ਤੇ ਕੰਟਰੋਲ ਰੱਖਣਾ ਅੱਛਾ ਇਹਨਾਂ ਸੂਤ ਪਰੋਵਣ ਹਾਰਾ ਪਰੋ ਕੇ ਰੱਖਿਆ ਹੈ ਕਾਬੂ ਚ ਰੱਖਿਆ ਹੈ ਸਰੀਰ ਅਗਿਆਕਾਰੀ ਕੀ ਨਹੀਂ ਮਾਇਆ ਬੁੱਧੀ ਹੈ ਉਹ ਅਕਲ ਹੈ ਜੋਤ ਹੈ ਕਿਉਂ ਆਕਾਰਾ ਉਹਨੇ ਆਕਾਰ ਆਪਣਾ ਆਸਾਰ ਬਣਾਇਆ ਇੱਛਾ ਸ਼ਕਤੀ ਪੈਦਾ ਕੀਤੀ ਐ ਪੈਦਾ ਕੀਤੀ ਸਰੀਰ ਦੇ ਰੂਪ ਚ ਪ੍ਰਗਟ ਆ ਹੁਣ ਉਹ ਬੁੱਧੀ ਕੋਲ ਇੱਕੋ ਹੀ ਸੂਤ ਹੈ ਉਹਦੀ ਇੱਛਾ ਸ਼ਕਤੀ ਹੈ ਉਹਦਾ ਸੂਤ ਹੈ ਉਹਨੇ ਆ ਸਰੀਰ ਦੇ ਨੂੰ ਆਪਣੇ ਵਿੱਚ ਆਪਣੇ ਕਾਬੂ ਚ ਰੱਖਿਆ ਹੈ ਸਰੀਰ ਨੂੰ ਆਪਣੇ ਕਾਬੂ ਚ ਹੁਜੀ ਤਿੰਨ ਪਿੰਨ ਤ੍ਰੈ ਗੁਣ ਵਿਸਤਾਰੰਗ ਸਰਗੁਣ ਵਿਸਤਾਰੰਗ ਤੈਨੂੰ ਕੋਣ ਤੇ ਤੈਨੂੰ ਕੋਣ ਨੇ ਬੁੱਧੀ ਦੇ ਕੋਲ ਰਜੋ ਤਮਸ ਸਤੋ ਸੁਭਾਅ ਨੇ ਤੈਨੂੰ ਕੋਣ ਨੇ ਉਹਦੇ ਕੋਲ ਮਾਇਆ ਦੇ ਵਿੱਚ ਰਾਜ ਗੁਣ ਤਮ ਗੁਣ ਸਤ ਬੁਰਾਈ ਬੁਰਾਈ ਤੋਂ ਰਹਿਤ ਪਰ ਭਲਾਈ ਭਲਾਈ ਹੈ ਸਤ ਬੁਰਾਈ ਤੋਂ ਰਹਿਤ ਰਾਜ ਹੈ ਬੁਰਾਈ ਤਮ ਗੁਣ ਤੈਨੂੰ ਗੁਣਾਂ ਚ ਵਿਸਥਾਰ ਹੈ ਇਹਦਾ ਸੌੜ ਫਾਲ ਵਾਲ ਚੜੀ ਜਾਵੇ ਕਿ ਕਿ ਨਾ ਜਾਵੇ ਬਰਾਬਰੇ ਰਹੇ ਚਾਹੇ ਕਮਾਈ ਕਰ ਲਵੇ ਸਤੋਂ ਗੁਣ ਤੇ ਸਰਗੁਣ ਨਿਰਗੁਣ ਤੇ ਜੇ ਸਰਗੁਣ ਵਾਲ ਹੋ ਜਵੇ ਸਾਰੇ ਗੁਣਾਂ ਬਲ ਚਲੀ ਜਾਵੇ ਸਾਰੇ ਗੁਣ ਪ੍ਰਾਪਤ ਕਰ ਲਵੇ ਤੇ ਦਸ਼ਮਾਨ ਨਹੀਂ ਸਭ ਕੁਝ ਹੋ ਜਾਂਦਾ ਫਾਦੀ ਸਮਝ ਆ ਜਾਂਦੀ ਇਹਨੂੰ ਤੇਰੇ ਸਮਝ ਆ ਜਾਂਦੀ ਹੈ ਦਸ਼ਮਾਨ ਹੋ ਜਾਂਦਾ ਸਭ ਕੁਝ ਤੇ ਆਪਣਾ ਆਪਣਾ ਜੋ ਮੂਲ ਹੈ ਆਪਣਾ ਆਪਾ ਇਹਨੂੰ ਦੇ ਜਾਂਦਾ ਹੈ ਤਨ ਵਿੱਚੋਂ ਮਨ ਖੋਜ ਲੈਣੀ ਹੈ ਮਨ ਵਿੱਚੋਂ ਜਿੱਦੀ ਲੋਸ਼ਟੀਆਂ ਹਨ ਹਨ ਦਾ ਮੂਲ ਵੀ ਸੋਜਿਆ ਜਾਂਦਾ ਉਹ ਤੇ ਸਬਾਨ ਹੋ ਜਾਂਦਾ ਇਹਨੂੰ ਸਭ ਕੁਝ ਪਰ ਫਿਰੋਂ ਤੋਂ ਸਰਗੁਣ ਹੋਣਾ ਅੱਛਾ ਗਿਆਨ ਪ੍ਰਾਪਤ ਕਰਨਾ ਪੈਗਾ ਆ ਨਿਰਗੁਣ ਦਾ ਅਸਲ ਦੇ ਵਿੱਚ ਔਗਣ ਨਹੀਂ ਗੁਣਵਰੀ ਬਹੁਤ ਹੈ ਨਿਰਗੁਣਿਆ ਕੀ ਬੇਨਤੀ ਸੁਣੋ ਗਰੀਬ ਬੰਮਾਜ ਉਗਣਾਰੇ ਹੋਰੇ ਉਗਣਾਰੇ ਤੇ ਧਿਰਗੁਣੇ ਮੇਰਕੁਣ ਤੇ ਸਰਗੁਣ ਰਜੋ ਗੁਣ ਦੇ ਧਿਰਗੁਣੇ ਫਤੋ ਗੁਣ ਤੇ ਸਰਗੁਣ ਇਹ ਦੇਖਣ ਨੂੰ ਜਾਂਦਾ ਤੇ ਆਪਣਾ ਆਪਾ ਦੀਦਾ ਤੇ ਤਮੋ ਗੁਣ ਚ ਤਮੋ ਗੁਣ ਦੇ ਵਿੱਚ ਉਗਣਾਰੇ ਗੁਣ ਗਲ ਜਾਂਦੇ ਨੇ ਠੀਕ ਹੈ ਜੀ ਹਰ ਗੁਣ ਗਲਿਆ ਹੈ ਜੀ अच्छा जी सगल भांत ਕਰ कर, करे उपायो जन्म मरण मन मोह बढायो सारे उपाय करदा है उपाय जन्म मरण मन मोह बढायो जन्म मरण दा चक्कर है मन दी मोह है सगल भांत कर उपायो कर उपायो करदे बावजूद भी सारीयां मत्ता उपाय दीना मत्ता ਉਹਨਾਂ ਦੇ ਕਰਨ ਦੇ باوجود ਵੀ ਕਰਮ ਦੇ باوجود ਵੀ ਜੈ ਮੋੜੀ ਛੁੱਟਿਆ ਮੰਨਦਾ ਬਹੁ ਨਹੀਂ ਛੁੱਟਿਆ ਮੰਨਦਾ ਉਹ ਸਭ ਉਹ ਵਧੀ ਆ ਪਰ ਜਿਹੜਾ ਅੰਦਰ ਗੁਰਮਖਾਇ ਉਹ ਦੋਹਾਂ ਪਾਂਤ ਦੇ ਨਾਲੇ ਨਾਨਕ ਅੰਤ ਨਾ ਪਾਰਾ ਵਾਰਾ ਜਿਹੜੀ ਬਾਹਰ ਆਤਮਾ ਹੈ ਮਨ ਹੈ ਮਨ ਕਰਕੇ ਇੱਕ ਪਾਸਾ ਜਿਹੜਾ ਮਾਇਆ ਨਾਲ ਜੁੜਿਆ ਹੈ ਉਧਰ ਉਹ ਹੈ ਦੂਏ ਪਾਸੇ ਹੈ। ਰੂਪਾਂ ਤੇ ਆਪ ਨਰਾਰਾ ਨਾਨਕਾਂ ਦਾ ਤਰ੍ਹਾਂ ਬਾਰ-ਬਾਰ। ਨਾਨਕਾਂ ਦਾ ਉਹਦਾ ਬਾਰ ਗੱਲ ਆਈ ਉੱਤੇ। ਇੱਕ ਪਾਸਾ ਗੁਰਮੁਖੀ ਹੈ ਇੱਕ ਪਾਸਾ ਮਦਮੁਖੀ ਹੈ ਨਾ। ਹੁਜੀ ਜੇ ਆਪਾਂ ਹੁਣ ਇਹਨਾਂ ਤਿੰਨਾਂ ਵਿਆਖਿਆਵਾਂ ਨੂੰ ਦੇਖੀਏ। ਕਬੀਰ ਸਾਹਿਬ ਨੇ ਕਿਹਾ ਸੀ ਓੰਕਾਰ ਆਦਮੈ ਜਾਨਣਾ। ਤੇ ਪੰਜਵੇਂ ਪਾਤਸ਼ਾਹ ਨੇ ਦੱਸਿਆ ਵੀ ਓੰਕਾਰ ਦਾ ਜਿਹੜਾ ਰੂਪ ਓਮ ਤੋਂ ਪੈਦਾ ਹੋਇਆ ਹੈ ਜੀ। ਤਾੜੀਆਂ ਕਦ ਹੈ ਜਾਣਿਆ ਜਦ ਅ ਤੋਂ ਸਰਗੁਣ ਹੋਇਆ ਤਾਂ ਜਾਣਿਆ। ਜਾਣਨਾ ਕਿਵੇਂ ਜਾਂਦਾ ਹੈ ਉਹ ਵੀ ਦੱਸਿਆ ਨਾ ਨਿਰਗੁਣ ਤੇ ਸਰਗੁਣ ਦੇ ਛਾਰੇ ਨੂੰ ਉਹਨੇ ਜਾਨਣਾ ਕਹਿਤਾ ਮੈਂ ਜਾਨਣਾ ਕਿਵੇਂ ਜਾਨਣਾ ਇਹਨਾਂ ਵੇਦ ਅਸਤਾ ਖੋਲ ਕੇ ਦੱਸਤਾ। ਠੀਕ ਆ ਇਹਨਾਂ ਨੇ ਦੋ ਔੜੀਆਂ ਵਿੱਚ ਵਿਆਖਿਆ ਕੀਤੀ ਹੈ। ਨਾਨਕ ਸਾਹਿਬ ਨੇ ਲਿਖਿਆ ਸੀਗਾ ਉੜੇ ਉਪਮਾ ਤਾਂ ਕੀ ਕੀਜੇ ਜਾਕਾਂ ਅੰਤ ਪਾਇਆ ਤੇ ਪੰਜਵੇਂ ਪਾਸ਼ਾ ਨੇ ਵੀ ਕਹਿ ਤਾ ਦੋਹਾਂ ਪਾਂ ਤੇ ਆਪ ਮੇਰਾ ਨਾਨਕ ਅੰਤ ਨਾ ਪਰਵਾਰਾ ਪਰਵਾਰਾ ਠੀਕ ਹੈ ਜੀ ਇੱਥੇ ਊੜੇ ਅੱਖਰ ਦਾ ਜਿਹੜਾ ਉਪਦੇਸ਼ ਆਪਾਂ ਨੂੰ ਪ੍ਰਾਪਤ ਹੈਗਾ ਤਿੰਨ ਬਾਣਿਆਂ ਚੋਂ ਜਿਹੜੀ ਤੀਸਰੇ ਪਾਸ਼ਾ ਨੇ ਪੱਟੀ ਲਿਖੀ ਹੈ ਉਹਦੇ ਵਿੱਚ ਊੜੇ ਅੱਖਰ ਦਾ ਕੋਈ ਉਪਦੇਸ਼ ਨਹੀਂ ਹੈ ਤਾਂ ਇੱਥੇ ਆਪਣਾ ਊੜੇ ਅੱਖਰ ਦਾ ਜਿਹੜਾ ਉਪਦੇਸ਼ ਹੈ ਸੰਪੰਨ ਹੁੰਦਾ ਜੀ Hi